ਕਹਿੰਦੇ ਕਬੀਰ ਜੀ ਦੀ ਬਾਵਨਾ ਦਾ ਆਹੇ ਅੱਖਰ ਤੋਂ ਉਪਦੇਸ਼ ਹੈ ਜੀ ਹਾ ਹਾ ਹੋਤ ਹੋਏ ਨਹੀਂ ਜਾਨਣਾ ਜਬ ਵੀ ਹੋਏ ਤਬੈ ਜਾਣਿਆ ਨਹੀਂ ਹੋਏ ਨਹੀਂ ਜਾਨਣਾ ਉਹਨੂੰ ਤਾਂ ਜਾਣਿਆ ਨਹੀਂ ਤਾਂ ਬੂਰਤੀਆਂ ਬਣਾ ਕੇ ਰਖ ਲਈਓ ਪਤਾ ਨਹੀਂ ਕਦ ਨੇ ਕਦਰ ਉਹ ਹੈ ਨਹੀਂ RAM ਚੱਤਰ ਇੱਕ ਜਿਹੜੇ ਸ਼ਾਸਤਰ ਸਭ ਨਾਲ ਤੇ ਬਣਾ ਲਿਆ ਤਾਂ ਉਹ ਕਿੱਥੋਂ ਕੱਢ ਲਿਆ ਜੋ ਹੋਤ ਹਮੇਸ਼ਾ ਰਹਿ ਹੈ ਉਹ ਕਹਦੇ ਨਹੀਂ ਆਪ ਇਹਦੀ ਹੋਂਦ ਹੁੰਦੀ ਹੈ ਨਾ ਆਪ ਆਪਣੇ ਆਪ ਨੂੰ ਉਹਦਾ ਰੂਪ ਜਦ ਆਪ ਹੋ ਜਾਂਦਾ ਨਾ ਹੈ ਨਿਰਗਾਰੀ ਰੂਪ ਉਹ ਸਰੀਰ ਤੋਂ ਵਖਰਾ ਰੂਪ ਆਪਣਾ ਖੋਜ ਲੈਂਦਾ ਚਲੇ ਆਪੇ ਉਹ ਰੂਪ ਹੋ ਜਾਂਦਾ ਹੈ ਚ ਆ ਜਾਂਦਾ ਫਿਰ ਇਹਦਾ ਮਨ ਮੰਨਦਾ ਵੀ ਆ ਜਿਹੜੀ ਜੋਤ ਹੈ ਇਹ ਹਮੇਸ਼ਾ ਰਹਿੰਦੀ ਹੈ ਇਹ ਦੁਆ ਜਨਮ ਲੈਂਦੀ ਵਾਰ-ਵਾਰ ਜਨਮ ਲੈਂਦੀ ਆ ਸਰੀਰ ਤਾਂ ਇੱਥੇ ਰਹਿ ਜਾਂਦਾ ਉਹ ਸਰੀਰ ਦਾ ਆਖ਼ਰੀ ਬੌੜੀ ਹੈ ਹਰੇਕ ਦਿਓ ਤੂੰ ਉਹਨੂੰ ਬਣਾ ਲਿਆ ਪਹਿਲੇ ਸਰੀਰ ਵੀ ਤਾਂ ਇਹ ਨਹੀਂ ਧਾਰਨ ਕੀਤਾ ਜ્યોਤ ਨੇ ਹੋਰ ਉਹ ਜੋਤ ਨੂੰ ਮੰਨਦਾ ਨਹੀਂ ਯਾਤ ਨੂੰ ਬੰਨੋ ਲਾ ਗਿਆ ਹਾਂਜੀ ਹੈ ਤੋ ਸਹੀ ਜੋ ਕੋਈ ਤਬ ਉਹੀ ਉਹੂ ਇਹ ਨਾ ਹੋਈ ਹੈ ਤੋ ਸਹੀ ਜੋਤ ਹੈ ਤਾ ਅੱਖਾਂ ਨੂੰ ਨਹੀਂ ਦਿਂਦਾ ਇਹ ਜੰਮਦਾ ਨਹੀਂ ਹੈ ਤਾ ਸਹੀ ਲਖੈ ਜੇ ਕੋਈ ਕੋਈ ਜੇ ਲਖਣਾ ਚਾਹੇ ਲਖਣਾ ਹੁੰਦਾ ਬੁੱਧੀ ਨਾਲ ਦੇਖਣਾ ਹੁੰਦਾ ਅੱਖਾਂ ਨਾਲ ਅੱਖਾਂ ਦੇ ਥ्रू ਦੇਖਿਆ ਜਾਂਦਾ ਹੈ ਅੱਖਾਂ ਦੇ ਬਿਨਾਂ ਨੈਤਰਾਂ ਦੇ ਬਿਨਾਂ ਦੇਖਿਆ ਜਾਂਦਾ ਲਖਾ ਜੇ ਕੋਈ ਜੇ ਲਖੇ ਹੈ ਤਾਂ ਸਹੀ ਬੁਧੇ ਲੋਕਾਂ ਨੇ ਹੈ ਹੀ ਨਹੀਂ ਜੋਤ ਕੋਈ ਹੁੰਦੀ ਹੋਈ ਨਹੀਂ ਪਰਮੇਸ਼ਰ ਕੁਝ ਹੁੰਦਾ ਹੀ ਨਹੀਂ ਰੱਬ ਹੈ ਹੀ ਨਹੀਂ ਕੋਈ ਹੈ ਸਹੀ ਲਖਾ ਜੇ ਕੋਈ ਜੇ ਕੋਈ ਅੰਗਲ ਵਿੱਚ ਉਹ ਬੰਦ ਜਾਂਦਾ ਜਿੰਨੂੰ ਜਨਰੀ ਦੇਖਦਾ ਉਹ ਬੰਦਾ ਨਹੀਂ ਫਿਰ ਉਹੀ ਉਹ ਹੈ ਫਿਰ ਫਿਰ ਹੋਰ ਕੁਝ ਨਹੀਂ ਰਹਿੰਦਾ ਬਾਕੀ ਸਭ ਮਿੱਟੀ ਹੈ ਬਾਕੀ ਨਾਸਵੰਦ ਸਭ ਕੁਝ ਜੇ ਜੋ ਸੱਚੇ ਰਹ ਜਾਂਦਾ ਬਾਕੀ ਸਭ ਝੂਠ ਹੈ ਠੀਕ ਹੈ ਕੋਈ ਆ ਜਾਂਦਾ ਜੋ ਤੇ ਜੋ ਅਮਰੀਕਾ ਵਾਸਤੇ ਹੈ ਬਾਕੀ ਸਭ ਇਧਰ ਹੀ ਅੱਛਾ ਇਹ ਅੱਖਾਂ ਨੂੰ ਨਹੀਂ ਲੱਜੋ ਕੁਝ ਉਹਦੀ ਹੋਂਦ ਫਿਰ ਅੰਦਰੋਂ ਮਿੰਟ ਚਲਦੀ ਹੈ ਵੇ ਹਾਲੇ ਮੂਰਤੀ ਨੂੰ ਬੰਦਾ ਨਾ ਹੈ ਗੱਲ ਮੂਰਤੀ ਦੀ ਆ ਉਹਦੀ ਹੈ ਉਹ ਮਾਨਤ ਜਿੱਦੀ ਦਾ ਦੋਇ ਨਰਾਕਾਰ ਤੇ ਖੜਾ ਹੈ ਜਿਹੜੇ ਤੁਹਾਨੂੰ ਉਪਦੇਸ਼ ਕਰਦਾ ਹੈ ਉਹ ਤਾਂ ਜਾਤ ਦਾ ਤੇ ਦਾ ਕੋਈ ਸਵਾਲ ਨਹੀਂ ਰਹਿ ਜਾਂਦਾ ਜੋਤ ਤੇ ਜੋਤ ਰਹਿ ਜਾਂਦੀ ਜੋਤ ਬਣ ਸਕਦੀ ਮੂਰਤੀਓ ਜਾਤ ਦੀ ਬਣਦੀ ਹੈ ਮੂਰਤੀ ਪੂਜਾ ਖਤ ਰਿਸ਼ਤਾ ਟੁੱਟ ਜਾਂਦਾ ਮਾਇਆ ਦੇ શરી ਦਾ ਤਾਂ ਮਤਲਬ ਨਹੀਂ ਲਾਈਦੀ ਉੱਥੇ ਜਾ ਪਰ ਜੇ ਲਖ ਲਵੇ ਤਾਂ ਉਹਨਾਂ ਜਦ ਰਸ ਨੂੰ ਦੇਖਦਾ ਨਾ ਹੋਰ ਦੇਖਦਾ ਹੀ ਕੋਈ ਨਹੀਂ ਹਾਂਜੀ ਠੀਕ ਹੈ ਜੀ ਇਹ ਹੈ ਜੀ 42ਵੀਂ ਪੌੜੀ ਕਬੀਰ ਜੀ ਦਾ ਉਪਦੇਸ਼ ਹੁਣ ਗੁਰੂ ਨਾਨਕ ਸਾਹਿਬ ਦਾ ਹੈ ਜੀ ਹਾਏ ਅੱਖਰ ਤੋਂ ਹਾ ਹੈ ਹੋਰ ਨਾ ਕੋਈ ਦਾਤਾ ਜੀ ਉਪਾਏ ਜਿਨ ਰਿਜਕ ਦਿਆ ਜੀ ਉਪਾਏ ਰਿਜਕ ਦਤ ਹੈ ਜੀ ਨੇ ਉਹ ਦਾਤਾ ਉਹਦੇ ਵਰਗਾ ਦਾਤਾ ਕੋਈ ਹੈ ਇਹ ਗਾ ਹਰ ਨਾਮ ਧਿਆਵੋ ਹਰ ਨਾਮ ਸਮਾਵੋ ਅਨ ਦਿਨ ਲਾਹਾ ਹਰ ਨਾਮ ਲੀਆ ਉਹ ਕੋਣੇ ਦਾਤਾ ਉਹ ਦਾਤਾ ਹੈ ਹਰ ਇਸ ਕਰਕੇ ਹਰ ਨਾਮ ਨੂੰ ਧਿਆਵੋ ਧਿਆਨ ਹਰ ਨਾਮ ਵਿੱਚ ਰੱਖੋ ਨਾਮ ਤੇ ਔਕੜ ਹੈ ਜੀ ਹਰ ਨਾਮ ਧਿਆਵੋ ਹਰ ਨਾਮ ਸਮਾਵੋ ਇਹ ਨਾਮ ਤੇ ਸਿਆਰੀ ਹੈ ਹਰ ਨਾਮ ਵਿੱਚ ਸਮਾਵੋ ਹਰ ਨਾਮ ਦੇ ਵਿੱਚ ਸਮਾਏ ਰਹੋ ਜਦ ਧਿਆਨ ਹੁੰਦਾ ਜਿੱਥੇ ਉੱਥੇ ਸਮਾ ਜਾਂਦਾ ਆ ਲਵੇ ਤੇ ਅੰਦਰ ਉਹ ਵਸਤੂ ਗਾਇਬ ਹੋ ਜਾਂਦੀ ਹੈ ਸਮਝ ਜਾਂਦਾ ਇਹ ਗੱਲਾਂ ਇਹ ਕਰਦੇ ਨੇ ਜੋਤ ਜੋਤ ਇਸ ਵਿੱਚ ਸਮਾ ਸਕਦੀ ਹੈ ਜੋਤੀ ਜੋਤ ਚ ਮਿਲਦੀ ਹੈ ਆਪਣਾ ਅੰਦਰ ਤਾਂ ਜਾਂਦਾ ਹੁੰਦਾ ਸੁੰਦਰੇ ਸਮਝ ਜਾਂਦਾ ਸਮਾਵੋ ਹਾਂਜੀ ਲਾਹ ਹਰ ਨਾਮ ਲਿਆ ਲਾਹ ਗਿਆ ਗਿਆਨ ਜਿਹੜਾ ਹੈ ਹਰ ਨਾਮ ਉਹਦਾ ਹੈ ਜਮਾ ਕੀਰਦਾ ਸਾਡੇ ਕੋਲ ਜਮਾ ਗਿਆਨ ਗਿਆਨ ਦੇ ਰੂਪ ਜਿਵੇਂ ਹੁੰਦਾ ਹੈ ਹਰ ਠੀਕ ਹੈ ਜੀ ਇੱਥੇ ਹਾਇ ਅੱਖਰ ਦਾ 27ਵੀਂ ਬਾਣੀ ਦਾ ਉਪਦੇਸ਼ ਸਮਾਪਤ ਹੈ ਜੀ ਹੁਣ ਗੁਰੂ ਅਮਰਦਾਸ ਜੀ ਦਾ ਉਪਦੇਸ਼ ਹੈ ਜੀ ਹਾਏ ਹਰ ਕਥਾ ਬੂਝ ਤੂੰ ਮੂੜੇ ਤਾਂ ਸਦਾ ਸੁਖ ਹੋਈ ਹਾਏ ਹਰ ਕਥਾ ਬੂਜ ਤੂੰ ਬੂੜੇ ਹਰ ਕੀ ਕਥਾ ਹੈ ਸਾਰੀ ਗੁਰਬਾਣੀ ਸਭ ਤੋਂ ਉੱਤਮ ਹੈ ਸਭ ਤੋਂ ਉੱਤਮ ਕਥਾ ਇਹ ਰੂਗਜ ਦੇ ਵਿੱਚ ਕੀ ਲਿਖਿਆ ਹੋਇਆ ਹੈ ਬਹੁਤ ਬੜੀ ਬੁਝਾਰਤ ਹੈ ਇਹ ਹਰ ਕੀ ਕਥਾ ਨੂੰ ਰੂਗਜ ਦੇ ਵਿੱਚ ਕੀ ਲਿਖਿਆ ਹੋਇਆ ਹਾਂਜੀ ਤਾਂ ਸਦਾ ਸੁਖ ਹੋਈ ਸਦਾ ਹੀ ਸੁੱਖ ਸਦਾ ਸੁਖ ਹੋ ਜੇ ਸਦਾ ਸੁਖ ਲੈਣਾ ਤਾਂ ਇਹ ਕਥਾ ਦੇ ਵਿੱਚ ਲਿਖਿਆ ਹੈ ਕਿ ਹਾਂਜੀ ਸਦਾ ਸੁਖ ਦਾ ਭਾਵ ਸੁਖ ਸਾਗੇ ਦੇ ਨਿਵਾਸ ਹੈ ਜੀ ਆਹ ਠੀਕ ਹੈ ਮਨਮੁਖੀ ਪੜੈ ਤੇਤਾ ਦੁੱਖ ਲੱਗੈ ਬਿਨ ਸਤਗੁਰ ਮੁਕਤ ਨਾ ਹੋਈ ਮਨਮੁਖ ਪੜਦੇ ਜਿਹੜੇ ਉਹਦੇ ਨੇ ਪਰ ਦੁੱਖੇ ਲੱਗਿਆ ਰਹਿੰਦਾ ਉਹਨਾਂ ਨੂੰ ਛੁਟਕਾਰਾ ਲਈ ਗੁਰਬਾਣੀ ਜਰੂਰ ਪੜਦੇ ਨੇ ਦੁੱਖਾਂ ਦਾ ਛੁਟਕਾਰਾ ਹੈ ਨਹੀਂ ਉਹਨਾਂ ਨੂੰ ਕੋ ਪੜਦੇ ਰਿਦਕਾਰਦੇ ਨਹੀਂ ਉਹਨੂੰ ਪੜੈ ਫਿਰ ਵੀ ਇਹਤਾ ਦੁੱਖ ਲੱਗੈ ਹਾਂਜੀ ਬਿਨ ਸਤਗੁਰ ਮੁਕਤੀ ਨਾ ਹੋਈ ਸਤਗੁਰ ਦੇ ਬਿਨਾ ਮੁਕਤੀ ਨਹੀਂ ਨਾ ਹੈ ਸਤਗੁਰ ਨਾਲ ਜੁੜੇ ਅੰਦਰ ਸਤਗੁਰ ਅੰਦਰ ਹੈ ਉਹ ਬਾਹਰ ਅੱਖਰਾਂ ਨਾਲ ਜੁੜੇ ਹੋਏ ਨੇ ਉਹ ਸਿਰਫ ਪੜੀ ਜਾਂਦੇ ਨੇ ਪੜਨ ਵੇਲੇ ਅੱਖਰਾਂ ਨਾਲ ਜੁੜਿਆ ਹੋਇਆ ਆਦ ਵੀ ਵਿਚਾਰਦਾ ਅੱਖਰਾਂ ਨਾਲ ਜੁੜ ਕੇ ਨਹੀਂ ਇਹ ਕੁਝ ਵੀ ਬਣਨਾ ਪੜਦਾ ਜਿਹੜਾ ਸਿਰਫ ਅੱਖਰਾਂ ਨਾਲ ਜੁੜਿਆ ਹੋਇਆ ਅੱਖਰ ਬੁਲਾਉਂਦੇ ਨੇ ਆ ਬੋਲਦਾ ਬਸ ਵਾਂ ਕੁਛ ਨਹੀਂ ਪਰ ਹਰ ਕਥਾ ਬੁਝ ਨਹੀਂ ਰਹੀ ਹਾਂ ਹਰ ਕਥਾ ਬੁਝਦੀ ਹੈ ਠੀਕ ਹੈ ਜੀ ਹੁਣ ਜੀ ਪਹਿਲਾ ਪੰਜਵਾਂ ਪੌੜੀ 51 ਪੌੜੀ ਹੇਰੋ ਘਟ ਘਟ ਸਗਲ ਕੈ ਪੂਰ ਰਹੇ ਭਗਵਾਨ ਹੋਵਤ ਆਏ ਸਦ ਸਦੀਵ ਦੁਖ ਭੰਜਨ ਗੁਰ ਗਿਆਨ ਸਾਰਿਆਂ ਦੇ ਘਟ ਹਿਰਦਿਆਂ ਦੇ ਵਿੱਚ ਮੈਂ ਦੇਖ ਰਿਹਾ ਪੂਰ ਰਹੇ ਭਗਵਾਨ ਘਟ ਘਟ ਮੈਂ ਹਰ ਬਸ ਹੈ ਉਹ ਮੈਂ ਦੇਖ ਰਿਹਾ ਜਾਂ ਦੇਖਿਆ ਤਾਂ ਕਹਿਤਾ ਤੁਹਾਡੇ ਘਰ ਮੈਂ ਇੱਥੇ ਹੀ ਰੂੰਗਾ ਤਾਂ ਗੱਲ ਕੇ ਘਟ ਕੋਈ ਭਗਵਾਨ ਭਗਵਾਨ ਦੇਖ ਰਿਹਾ ਅੱਛਾ ਇੱਥੇ ਭਗਵਾਨ ਦਾ ਭਾਵ ਸਤਗੁਰ ਹੈ ਜੀ ਕਾ ਸਤਗੁਰ ਹੈ ਹਰਜੂ ਹੈ ਕੋਈ ਗੱਲ ਹੋਵਤ ਆਏ ਸਤਸਦੀਵ ਦੁਖ ਭੰਜਨ ਗੁਰ ਗਿਆਨ ਹੋਵਤ ਆਏ ਸਤਸਦੀਵ ਉਸ ਫਜ਼ਰੀਬ ਹੁੰਦਾ ਹੀ ਆਇਆ ਕੌਣ ਹੈ ਉਹ ਦੁੱਖ ਪੰਚਨ ਗਾਂ ਕੀ ਬੰਦਾ ਹੈ ਉਹ ਦੁੱਖ ਪੰਚਨ ਗੁਰ ਗਿਆਨ ਉਹ ਗੁਰਦਾ ਕਹਿੰਦਾ ਹੈ ਜਾਂ ਅੰਤਰਾਤਮ ਦੀ ਆਵਾਜ਼ ਉਹ ਕਹਿਦੀ ਹੈ ਉਹ ਦਾ ਨਾਸ ਕਰਨ ਵਾਲੀ ਹੈ ਜੇ ਉਹ ਨੂੰ ਬਣੀ ਗੁਰਬਾਣੀ ਜੋ ਕਹਿੰਦੀ ਹੈ ਗੁਰਬਾਣੀ ਦਾ ਜੋ ਗਿਆਨ ਹੈ ਇਹ ਦੁੱਖਾਂ ਦਾ ਨਾਸ ਕਰਦਾ ਹੈ ਹਾਂਜੀ ਪੌਂਛ ਹੋਏ ਆਨੰਦ ਤਹ ਹੋਂ ਨਹੀਂ ਤਹ ਆਪ ਹਤੇ ਦੁਖ ਜਨਮ ਮਰਨ ਸੰਤ ਸੰਗ ਪ੍ਰਤਾਪ ਹੋਂ ਜੁੜ ਕੇ ਹੋਏ ਆਨੰਦ ਜਦ ਹੰਕਾਰ ਛੁੱਟ ਜਾਂਦਾ ਨਹੀਂ ਛੁੱਟ ਜਾਂਦੀ ਆ ਆਨੰਦ ਆ ਜਾਂਦਾ ਉੱਥੇ ਉੱਥੇ ਆਨੰਦ ਆ ਜਾਂਦਾ ਜੇ ਹੋਂ ਨਹੀਂ ਆਪ ਜਿੱਤੇ ਹੰਕਾਰ ਨਹੀਂ ਉੱਥੇ ਉਹ ਆਪ ਹੈ ਉੱਥੇ ਹੁਕਮ ਹੈ ਜਿੱਤੇ ਮੇਰਾ ਹੁਕਮ ਨਹੀਂ ਹੈ ਖਤਮ ਹੋ ਜਾਂਦਾ ਉੱਥੇ ਉਹਦਾ ਹੁਕਮ ਉਹ ਜਗ੍ਹਾ ਲੈ ਲੈਂਦਾ ਜਿੱਤੇ ਮੇਰੀ ਬਾਜ਼ੀ ਖਤਮ ਆ ਉੱਥੇ ਪਰ ਮੇਰੇ ਸ਼ਰਮ ਦੀ ਮਰਜ਼ੀ ਆ ਜਾਂਦੀ ਉਹ ਜਗ੍ਹਾ ਤੇ ਮੈਂ ਕਦੇ ਨਹੀਂ ਰਹਿਣਾ ਕਦੇ ਵੀ ਖਾਲੀ ਨਹੀਂ ਰਹਿੰਦੀ ਸੀਟ ਠੀਕ ਹੈ ਜੀ ਹੋਂ ਨਹੀਂ ਤੇ ਤੇ ਆਪੇ ਇਹ ਹਾਂ ਔਰ ਕੀ ਫਰਕ ਹੈ ਜੀ ਹੋਏ ਆਨੰਦ ਉਹ ਉਹਦੇ ਆ ਜਾਂਦੀ ਐ ਮੈਂ ਜਾਉਂ ਨਹੀਂ ਹਾਂ ਅੱਲਿ ਮੈਂ ਜਾਂਉਂਦੀ ਹੁੰਦੀ ਐ ਆ ਜਾਂਦੀ ਹਾਂ ਮੈਂ ਦੋਏ ਉਧਰ ਅੰਦਲੇ ਚ ਛੁੱਟੀ ਆ ਉਹ ਹੋਂ ਵਿੱਚ ਆ ਉਹ ਵਿੱਚ ਗਿਆ ਉਹ ਹੋਂ ਵਿੱਚ ਹੁੰਦਾ ਹੋਂ ਵਿੱਚ ਜਾਂਦਾ ਮੈਂ ਤਾਂ ਸਰੀਰ ਕਰਕੇ ਹੁੰਦੀ ਐ ਭਰਮ ਕਰਕੇ ਹੋਂ ਐ ਬਾਹਰ ਦੇ ਬਾਹਰ ਦੇ ਸਰੀਰ ਕਰਕੇ ਮੈਂ ਹਾਂਜੀ ਤੈ ਹੋਂ ਨਹੀਂ ਤੈ ਆਪ ਜੋ ਨਹੀਂ ਉਤੇ ਆਪਾ ਹਤੇ ਦੁਖ ਮਰਨ ਸੰਤ ਸੰਗ ਪਰਤਾਪ ਦੁੱਖ ਵਿੱਚ ਜਨਮ ਮਰਨ ਸੰਤ ਸੰਗ ਪਰਤਾਪ ਜੇ दुख मन कटया गया संत संग प्रताप नाल अपे आनंद दे दुख कटे जांदे नहीं जन्म मन कटया जांदा है दुख भी कटे जांदा है किवें कटोंदा संत प्रताप सुंदरले दी प्रताप नाल संत संग प्रताप हां जी भव सदरी संगत नाल दे प्रताप ना। ज्ञान दे पर... ज्ञान दी रोशनी नाल ज्ञान दे प्रताप नाल ठीक है ਸੰਤ ਸੰਗ ਹੋਤਿ ਕਿਰਪਾਲਾ ਇਤ ਕਰਕੇ ਚਿਤਕਾਰੀ ਦਾ ਨਾਮ ਕਰਨਾ ਚਾਹੀਦਾ ਹੈ ਆਪਣੀ ਦੀ ਗੱਲ ਹੈ ਜਪਨ ਕਰਨਾ ਦਾ ਅੱਛਾ ਕਿਰਪਾ ਕਰਦਾ ਜੇ ਸੰਤ ਸੰਗੀ ਹੋ ਜਾਂਦਾ ਨਾਮ ਵੀ ਮਿਲ ਜਾਂਦਾ ਹੈ ਹਾਂ ਜੀ ਪੁਰਾ ਕਿਨੂ ਕੀਆ ਨਾਨਕ ਸਭ ਕਛ ਪ੍ਰਭ ਤੇ ਹੋਆ ਇਹ ਤਾਂ ਸੰਸਾਰ 'ਚ ਕੋਈ ਇੱਟ ਕਿਸੇ ਨੂੰ ਕੁਝ ਨਹੀਂ ਕੀਤਾ। ਕੁਝ ਨਹੀਂ ਕਰ ਸਕਦਾ ਕੋਈ। ਇਹ ਪੁੰਨ ਪਾਪ ਇਸ ਕਰਕੇ ਨਹੀਂ ਹੈ। ਬੜੇ ਬੜੇ ਜਿਹੜੇ ਉਹ ਕਹਿ ਲੈਨੇ ਵਰਦੇਤਾ ਸ਼ਰਾਪ ਦੇਤਾ, ਆ ਕਰਤਾ ਉਹ ਕਰਤਾ, ਕਿਸੇ ਨੂੰ ਕੀਤਾ ਇੱਥੇ। ਕੋਈ ਪੈਦਾ ਕਰਦਾ ਕਹਿੰਦਾ, ਕੌਣ ਪੈਦਾ ਕਰਦਾ, ਕੋਈ ਪਾਲਣਾ ਕਰਦਾ, ਕੁਝ ਨਹੀਂ ਕਰਦਾ ਸਾ ਸੰਸਾਰੀ ਆਦਮੀਆਂ ਨੇ ਕੋਈ ਕਿਸੇ ਨੂੰ ਕੁਝ ਨਹੀਂ ਕੀਤਾ। ਪ੍ਰਵਾਣੀ ਦੇ ਦਰਗਾਹ 'ਚ ਫਰਮਾਨ ਹੈ ਉਹ ਮੰਨਦੇ। ਖਾਡਾ ਬਣਾਇਆ ਹੋਇਆ ਆ ਜੀ ਆਪਣੇ ਆਪ ਠੀਕ ਹੈ ਜੀ ਨਾਨਕ ਸਭ ਕੁਝ ਪ੍ਰਭ ਤੇ ਹੋਇਆ ਆ ਆ ਪ੍ਰਭ ਤੇ ਹੀ ਸਭ ਕੁਝ ਹੋਇਆ ਹੋਇਆ ਹੈ ਇਹ ਤਾਂ ਇਹ ਤਾਂ ਕਰ ਸਕਦਾ ਠੀਕ ਹੈ ਜੀ ਇਹ 51ਵੀਂ ਪੌੜੀ ਦਾ ਉਪਦੇਸ਼ ਹੈ ਜੀ ਹੁਣ ਇੱਕ ਪੌੜੀ ਹੋਰ ਹੈ 55ਵੀਂ 'ਚ ਵੀ ਹਾਏ ਤੋਂ ਹੈਗਾ ਪੌੜੀ ਹੇ ਅਚੁੱਤ ਹੇ ਪਾਰਬ੍ਰह्म ਅਬਨਾਸੀ ਅਗਨਾਸ਼ ਇਹ ਪੂਰਨ ਹੈ ਸਰਬ ਮੈਂ ਦੁਖ ਭੰਜਨ ਤਾਸ ਅਗ ਪਾਪਾ ਦਾ ਨਾਸ ਕਰਨ ਵਾਲਾ ਹੁਕਮ ਦਾ ਜਿਹੜਾ ਵਿਰੋਧ ਹੈ ਅਗਨਾਸ਼ ਅਗਨਾਸ਼ ਇਹ ਮਰਦਾ ਨਹੀਂ ਹੈ ਪਾਰ ਹੈ ਬ੍ਰਹਮ ਤੋਂ ਘਾਹ ਤੂੰ ਪਾਰ ਬ੍ਰਹਮ ਅਗਨਾਸ਼ੀ ਪਾਪਾ ਦਾ ਨਾਸ ਕਰਨ ਵਾਲਾ ਤੂੰ ਇਹ ਗੋਲ ਦੇ ਉਹ ਹੈ ਅਗਨ ਆਸ ਹੈ ਹੇ ਪੂਰਨ ਦੁਖ ਭੰਜਨ ਗੁਣਤਾਸ ਪੂਰਨ ਤੂ ਪੂਰਨ ਤੂ ਸਾਰਿਆਂ ਦੇ ਵਿੱਚ ਸਰਬਮੈਂ ਦੁਖ ਭੰਜਨ ਗੁਣਤਾਸ ਤੇਰੇ ਜਿਹੜੇ ਗੁਣ ਨੇ ਦੁੱਖਾਂ ਦਾ ਨਾਸ ਕਰਨ ਵਾਲੇ ਨੇ ਲੋ ਹੇ ਸੰਗੀ ਹੈ ਨਿਰੰਕਾਰ ਹੇ ਨਿਰਗੁਣ ਸਭ ਏਕ ਜਿੰਨੇ ਵੀ ਨਿਰਗੁਣ ਨੇ ਜੀਵ ਨੇ ਇਹਨਾਂ ਦੀ ਏਕ ਹੈ ਤੂੰ ਇਹਨਾਂ ਦਾ ਆਸਰਾ ਨੇ ਤੂੰ ਨਿਰਗੁਣ ਦੀ ਠੇਕ ਹੈ ਤੂੰ ਤੇ ਸੰਗੀ ਹੈ ਤੂੰ ਤੇ ਸੰਗੀ ਹੈ ਨਿਰਕਾਰ ਨਿਰਕਾਰ ਹੈ ਤੂੰ ਅਕਾਰ ਨਹੀਂ ਤੇਰਾ ਕੋਈ ਜਿਹੜੇ ਨਿਰਗੁਣ ਨੇ ਉਹਨਾਂ ਦੀ ਠੇਕ ਹੈ ਤੂੰ ਉਹਨਾਂ ਦਾ ਆਸਰਾ ਤੂੰ ਕੋਈ ਆਸਰਾ ਨਹੀਂ ਸਕਦਾ ਹਾਂਜੀ اے ਗੋਬਿੰਦ ਹੈ ਗੁਣ ਨਿਧਾਨ ਜਾ ਕੇ ਸਦਾ ਵਿਵੇਕ ਤੇ ਗੋਬਿੰਦ ਤੂੰ ਗੋਬਿੰਦ ਵੀ ਤੂੰ ਹੀ ਹੈ ਗੁਣ ਨਿਧਾਨ ਵੀ ਤੂੰ ਹੀ ਹੈ ਤੇਰੀ ਸੰਗਤ ਵਿੱਚ ਵਿਵੇਕ ਹੈ ਤੇਰੀ ਸੰਗਤ ਹੀ ਦੇ ਵਿੱਚੋਂ ਵਿਵੇਕ ਪ੍ਰਾਪਤ ਆ ਵਿਵੇਕ ਦੀ ਪ੍ਰਾਪਤੀ ਆ ਤੇਰੀ ਸੰਗਤ ਨਾਲ ਵਿਵੇਕੀ ਆ ਤੇਰਾ ਸੰਗੀਤੋ ਵਿਵੇਕੀ ਆ ਗੁਦਵਾਨ ਬਵੇਕੂਤੀ ਵਾਲੇ ਹੈ ਵੀ ਹੋਵਣ ਹਾਰ ਏ ਤੂੰ ਆ ਹਮੇਸ਼ਾ ਹੁੰਦਾ ਰਹੇ ਹਰ ਹਰੇ ਤੂੰ ਆਪ ਹਰੇ ਹੈ ਤੇਰੇ ਨਾਲੇ ਸਾਰੇ ਜਿਹੜੇ ਸਰੀਰ ਨੇ ਹਰੇ ਭਰੇ ਨੇ ਅਰ ਹਰੇ ਹਰ आप हैं हरे컬ना हरे हर हरे भी होवनहार तू है भी होवनहार भी भी हैगा रहेगा भी सदा संगी निधारा आधार हे ठाकुर औ निर्गुण गुण नहीं कोई संता के सदा संग संता के सदा संग रहने वाले तू ਵਿਧਾਰਿਆਂ ਜਿਨ੍ਹਾਂ ਦਾ ਆਧਾਰ ਕੋਈ ਨਹੀਂ ਨਿਰਧਾਰ ਦੇ ਉਹਨਾਂ ਦਾ ਆਧਾਰ ਵੀ ਤੂੰ ਹੈ ਆਧਾਰਾਂ ਆਧਾਰ ਠੇਖਾ ਕਰ ਤੂੰ ਠਾਕੁਰ ਅਸੀਂ ਤੇਰੇ ਦਾਸ ਰੇ ਹਾਂ ਹਾਂ ਮੈਂ ਮੇਰੇ ਕੋਲ ਕੋਈ ਗੁਣ ਨਹੀਂ ਹੈ ਗੁਣ ਨਹੀਂ ਕੋਈ ਹਾਂ ਗੁਣ ਨਹੀਂ ਕੋਈ ਨਿਰਗੁਣਿਆਂ ਦਾ ਆਧਾਰ ਹੈ ਤੂੰ ਨਾਨਕ ਦੀਜੇ ਨਾਮਦਾਨ ਰੱਖੋ ਹੀਏ ਪਰੋਈ ਨਾਨਕ ਨੂੰ ਨਾਮ ਦਾ ਦਾਨ ਦੇ ਮੈਂ ਉਹਨੂੰ ਆਪਣੇ ਨਾਮ ਤੇਰੇ ਨਾਮ ਨੂੰ ਹਿਰਦੈ ਪਰੋ ਕੇ ਰੱਖਾਂ ਆਪਣੇ ਉਹਦਾ ਹਾਰ ਪਾ ਕੇ ਰੱਖਾਂ ਹਾਂਜੀ ਇੱਥੇ ਹਾਏ ਅੱਖਰ ਦੇ ਉਪਦੇਸ਼ ਦੀ ਸਮਾਪਤੀ ਇਹ 55ਵੀਂ ਪੌੜੀ ਦਾ ਉਪਦੇਸ਼ ਸੀ ਅਗਲੀ ਵਾਰ ਆਪਾਂ ਕੱਕੇ ਤੋਂ ਸ਼ੁਰੂ ਕਰਾਂਗੇ